ਨਸਪਦੇ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਇਹ ਗੋਪਾਲ ਨੇ ਟੁੱਟੀ ਗੰਢ ਨਹੀਂ ਆਉਣਾ ਆਪਣੇ ਉੱਥੇ ਆਪਾ ਹੁਣ ਸੱਚਾ ਅੰਦਰ ਟੁੱਟੇ ਨਹੀਂ ਆਉਂਦੇ ਸੰਤ ਗੁਰੂਆਂ ਇਹ ਗੋਪਾਲ ਟੁੱਟੀ ਗੰਢ ਹਾਰਾ ਇਹਨਾਂ ਪ੍ਰਭੂ ਗੋਪਾਲ ਹੈ ਉਹ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਰਬ ਜੀਆਂ ਆਪੇ ਪ੍ਰਤਪਾਲ ਐ ਜੀ ਅੱਜ ਸਾਰਿਆਂ ਦੇ ਕੋਲ ਹੀ ਗੱਲ ਦਾ ਸਾਰੇ ਜੀਆਂ ਦਾ ਬੋਲ ਆ ਦੇਹੀਆ ਇੱਕ ਦੇ ਜਨਾ ਇੱਕ ਤਾਂ ਕਾਲਿਆਵਾ ਬਾਹਮੀਆ ਕਿਦੇ ਹਿੰਦੋਈ ਤਾਂ ਹੀ ਕਿਦੇ ਹਰਕਾਲਾ ਜੋ ਮਾ ਸ੍ਰੀ ਹਾਂ ਕੋਈ ਯਾਦ ਹੋ ਦੀਆਂ ਮਾਨੇ ਕੋਈ ਯਾਦ ਹੋ ਦੀਓ ਬਰਬੀ ਜੀ ਆਪੇ ਪਰਸਵਾ ਸਾਰੇ ਜੀਆਂ ਨੇ ਬਸ ਬੋਲ ਆ ਜਦ ਤੱਕ ਉਹ ਵਾਗਰ ਜਾ ਉਹਨੂੰ ਤੋ ਇਸਨੇ ਹਾਂ ਹਾਂਜੀ ਸਗਲ ਦੀ ਚਿੰਤਾ ਜਿਸ ਬਨ ਮਾਹੇ ਇਸ ਤੇ ਬਿਰਤਾ ਕੋਈ ਨਾ ਰਾਮ ਵਾਲੀ ਆਵਾਜ਼ ਤਾਂ ਨੂੰ ਸਾਥ ਛੜਨੋ ਸਲਾਹ ਹੈ ਰਾਮ ਵਾਲੀ ਆਵਾਜ਼ ਤੋਂ ਹੈ ਸਲਾਹ ਸਵਾ ਦੁਨੀਆ ਇਹ ਕਰਦਾ ਆਪਣਾ ਇਧਰ ਉਧਰੋਂ ਜਾ ਕੇ ਗੱਲਾਂ ਕਰਕੇ ਛਿਕੇ ਇੱਧਰ ਹੀ ਅਲੱਗਾ ਉਧਰ ਵਾਲਾ ਤੋਂ ਇਕ ਕੁਦਰਤੀ ਮੱਤ ਹੈ ਇਕ ਕੁਦਰਤੀ ਮੱਤ ਹੈ ਅੰਤਰਾਧੁਨੀ ਵਾਏ ਇੱਕ ਕਰਨਾ ਜਵਾਬ ਪਹਿਨੀ ਹੋ ਸੰਧਾਰੀ ਇਕ ਅੰਤਰਾਧੁਨੀ ਵਾਏ ਹਾਂਜੀ ਸਗਲ ਦੀ ਚਿੰਤਾ ਜਿਸ ਮਨ ਮਾਹੇ ਇਸ ਤੇ ਮਨ ਆਹੇ ਸਾਰਿਆਂ ਦੀ ਚਿੰਤਾ ਹੋਵੇ ਇਹਦੇ ਤਾਂ ਆਪਣੇ ਬੰਦਗੀ ਦੀ ਚਿੰਤਾ ਥੱਲੇ-ਥੱਲੇ ਦੀ ਇਹ ਤਾਂ ਸਭੀ ਚਿੰਤਾ ਹੋਵੇ ਕਿਸੇ ਦਾ ਤਾਂ ਕੋਈ ਨਹੀਂ ਉਹ ਤਾਂ ਜਿੱਥੇ ਕੋਈ ਨਹੀਂ ਸਾਰੇ ਨਾਲ ਡਰਉਂ ਉਹ ਕੋਈ ਜਰਾ ਨਾ ਅਦਰ ਵਾਹ ਕਭੀ ਸਾਰੇ ਸੱਚ ਘਾਟਦਾ ਜਿਹੜਾ ਇਹਨਾਂ ਧਿਆਨ ਕੋਈ ਸਾਰਿਆਂ ਦਾ ਸੱਚ ਹੈ ਨਾ ਕੋਈ ਦੂਜੇ ਆਪਣੇ ਸਾਰਿਆਂ ਦੇ ਹਾਂ ਉਹਦਾ ਸਾਰਿਆਂ ਜਿਹਦਾ ਸਾਰਿਆਂ ਤਾਂ ਹੋਰ ਹੈ ਜਿਹਦਾ ਆਪਣੇ ਆਪਣੇ ਤੇ ਆ ਉਹ ਹੋ ਇੱਕ ਰਾਜਾ ਰਾਮ ਹੈ ਇਸ ਰਾਮ ਨੇ ਰਾਜਾ ਰਾਮ ਨੇ ਤਖੜੀਆਂ ਬੜੇ ਬਣਾਏ ਨਾ ਕਦੂਜਣਾਰੇ ਖਾਏ ਕੂਜਣਾਲਾ ਰਾਮ ਨੇ ਖਾਲੇ ਰਾਮ ਨੇ ਬੜਾਏ ਰਾਮ ਉਹ ਵੀ ਕੂਜਣਾਲਾ ਨੇ ਖਾਲੇ ਜਿਹੜੇ ਬੇਬੂਜੇ ਪਸ਼ੂ ਤੋਂ ਹਟਦੇ ਰੂਹ ਦੇ ਸੁੱਕੇ ਹੀ ਦੁੱਧ ਮਰਵਾਣੇ ਨੂੰ ਸੁੱਕਾ ਹੋ ਜਾ ਖੁਸ਼ਬੂ ਕਹਿੰਦਾ ਨਹੀਂ ਫਟਦੀ ਕਿਉਂ ਖੁਸ਼ਬੂ ਜਿਆਦਾ ਤੇਜ਼ ਹੈ ਮੱਖੀ ਚੱਲਣਾ ਪਰ ਹੜਾ ਪਰ ਹੜਾ ਜਿਹੜਾ ਗੰਨ ਚਾਰ ਰਿਗਤ ਤਾਂ ਉਹ ਬੱਚੀ ਜੱਟ ਜੀ ਤੋਂ ਕਿ ਖੁਸ਼ਬੂ ਤੇ ਜ਼ਿਆਦਾ ਸੀ ਬਚਨੇ ਆਇਓ ਐਨਾ ਸਾਥ ਨਹੀਂ ਹੈ ਬੜੀ ਮੁਸ਼ਕਲ ਹੈਗਾ ਉਹ ਚੰਗਾ ਹਾਂ ਸਗਰ ਕੀ ਚੇਤਾ ਜਿਸ ਮਨ ਮਾਹੇ ਇਸ ਤੇ ਵੇਥਾ ਕੋਈ ਨਹੀਂ ਮਿਹਰੇ ਪਰਮੇਸ਼ਰ ਦੇ ਅੰਦਰ ਸਾਰਾ ਇਹ ਜੱਗ ਹੈ ਉਹਦੇ ਵੀ ਵੇਥਾ ਕੋਈ ਨਹੀਂ ਉਹ ਵੀ ਸਾਰਿਆਂ ਨਾਲ ਹੈ ਉਹ ਵੀ ਸਰਬ ਉਹ ਤਾਂ ਸਰਬ ਵਿਆਪੀ ਹੀ ਹੈ ਸਰਬ ਵਿਆਪੀ ਹੈ ਉਹਦੇ ਵੇਥਾ ਕਿਤੇ ਕੋਈ ਉਹ ਵੀ ਨਾਲ ਹੈ ਸਭ ਮੇਰੇ ਸਦਾ ਹਰ ਜਾਤ ਪ੍ਰਭ ਆਪੇ ਆਵੇ ਰੇ ਮੇਰੇ ਸਦਾ ਹਰ ਜਾਤ ਪਰ ਤੂੰ ਜਪਣਾ ਹਰੇ ਆਪਣਾ ਮੂਰੇ ਜਪੜਾ ਹੈ ਆ ਆਪਣਾ ਐਸੇ ਨਾ ਕਰ ਇਹਨੇ ਅਗਲਾ ਕਰਨਾ ਹੈ ਕੰਮ ਉਹ ਇਹਦਾ ਕੰਮ ਨਾਲੇ ਮੈਸੇਜ ਆਉਂਦੇ ਕੋੜੇ ਹੁਣ ਆਹ ਮੈਸੇਜ ਉਹਦੇ ਕੋੜੇ ਹੁਣ ਕਿ ਆਪਾਂ ਜਪਾਂਗੇ ਵੀ ਆਪਣਾ ਇਹ ਸਿਮਰਨ ਕਰੂ ਕਿ ਆਪਾਂ ਜਪਾਂਗੇ ਸਿਮਰਨ ਇਹ ਕਰੂ ਜਾਂ ਆਪਾਂ ਜਪ ਛੱਡ ਉਹਨੇ ਸਿਮਰਨ ਕਰ ਕਈ ਫੌਜੀ ਜਾਂਦੇ ਸਾਲੇ ਆਪਣੇ ਅਟਾਰ ਹੋ ਗਿਆ ਜਾਂਦੇ ਛੁੱਟੀ ਆ ਜਾਂਦੀ ਉਹ ਫੌਜ ਦੇ ਵਿੱਚ ਤੇ ਤੇ ਮਾਗੇ ਦੋ ਮਹੀਨੇ ਛੁੱਟੀ ਆ ਕਿਉਂ ਨਾ ਕੰਮ ਕਰਸ ਪੜਨਾ ਆਪਣੇ ਭਾਈ ਸਾਡੇ ਰੱਖੋ ਕੰਮ ਕਰਨਾ ਸਾਰਾ ਦਿਨ ਆਪਣੇ ਨਾਲ ਜਾਣਾ ਸਾਰਾ ਫੌਜੀਆ ਹਰ ਰੋਜ਼ ਬਸ ਕਾ ਉਹ ਕਮਾ ਮੇਲੇ ਲੈ ਕੇ ਰਾਜੀ ਜੀ ਤੁਸੀਂ ਮੇਲੇ ਲੈਣੇ ਤੁਸੀਂ ਵਾਲੇ ਜਿਹੜੇ ਰਾਜੀ ਜੀ ਕਰਦੇ ਉਹਦੇ ਗੋਂ ਮੇਰੇ ਸਦਾ ਹਰ ਜਾਪ ਉਹ ਦਲਿਤਰੀ ਨਹੀਂ ਚੱਟ ਰਾਜ ਤੇ ਜਪੂ ਹੋ ਉਹ ਦਲਿਤਰੀ ਉਹ ਕਿਵੇਂ ਰਹਿ ਸਕਦਾ ਉਹ ਇਹ ਜਪਦਾ ਟਾਈਮ ਇਹਨੂੰ ਪਤਾ ਲੱਗੇ ਇਹ ਤਾਂ ਮੇਡੋਮੀਆ ਦਾ ਘਟਦਾ ਨਾ ਉੱਠ ਗਰੇ ਜੇ ਉਹ ਚੇਲੇ ਜਦੋਂ ਟਾਂਡਾ ਪੈ ਗਾ ਉਹਨੂੰ ਗੁਰੂ ਵੀ ਦੇਖਦਾ ਤੇ ਕਹੋਸ਼ਾ ਮੈਨੂੰ ਘਟਾ ਪਹਿਲਾਂ ਚਾਹੀਦਾ ਇਹ ਚੇਲੇ ਕਹਿੰਦੇ ਉੱਠਾ ਲਾ ਕੇ ਵੀ ਟ੍ਰਿਕਾ ਨਾ ਆਪਣੇ ਹੀ ਖੇਲ ਜੋ ਗੱਲਾ ਤੇ ਚੇਲਾ ਉਥੇ ਜਦ ਸ਼ੁਰੂ ਰੱਖੂ ਤੇ ਗੁਰੂ ਨੇ ਉਹ ਕਹਿਤਾ ਸਾਡਾ ਨਹੀਂ ਤੂੰ ਉਸੇ ਮੰਡ ਕਰ ਕਹਿਤਾ ਸਾਡਾ ਨਹੀਂ ਮੈਸੇਜ ਤਾਂ ਦੇਦਾ ਬਿਨਾ ਬੋਲੇ ਤੇ ਹੀ ਕੰਮ ਬਿਲਕੁਲ ਸਮਝ ਆ ਜਾਂਦਾ ਮੈਨੂੰ ਪਤਾ ਦੇ ਬੋਲੇ ਜਾਂਦਾ ਉਹ ਇਹ ਕਿਉਂ ਕਰਦਾ ਇਹ ਵੀ ਉਹ ਜਾਣਦਾ ਹੈ ਇਹ ਕਿਉਂ ਮੈਨੂੰ ਕਰਨਾ ਚਾਹੀਦਾ ਵੈਸੇ ਤੈਨੂੰ ਕਹਾਂਦਾ ਹੈ ਨਹੀਂ ਬੱਸ ਤੈਨੂੰ ਕਰਨਾ ਚਾਹੀਦਾ ਤਾਂ ਕਰਦਾ ਮੈਂ ਜਦੋਂ ਤੂੰ ਕਰੀ ਜਾਂਦਾ ਮੈਂ ਆਪਣੇ ਕੋਲ ਕਰਦਾ ਤੂੰ ਆਪਣੀ ਕੋਲ ਹੀ ਕਰਦਾ ਬਣਾ ਬਠਾ ਮੇਰਾ ਗੁਰੂ ਹੈ ਬਸ ਕੌਣਾ ਮੇਰਾ ਗੁਰੂ ਹੈ ਸਭ ਦੇ ਕਿ ਜੇ ਮੈਂ ਕਹਦਾ ਉਹ ਨਹੀਂ ਕਹਦਾ ਇਹ ਕਿਤੇ ਦਰਚੇ ਤਾਂ ਕਰਦਾ ਸਭ ਬਿਲਕੁਲ ਜਾਣਦਾ ਨਾ ਸਭ ਉਹ ਇਹਨੂੰ ਵੀ ਬਤਾ ਦੇਣ ਬੋਲੇ ਸਭ ਜਾਣਦਾ ਇਹ ਜਾਣ ਕੇ ਕਹਿੰਦਾ ਮੈਨੂੰ ਬੋਲੇ ਸਭ ਕੁਝ ਆਉਂਦਾ ਸਭ ਤਾਂ ਮੈਨੂੰ ਬੋਲੇ ਸਭ ਕੁਝ ਆਉਂਦਾ ਅਸੀਂ ਭਗਤੀ ਕਿਉਂ ਕਰਦੇ ਆ ਕਿ ਜਾਣਦਾ ਜਦ ਜਦ ਦੇਖੋ ਇਹਦੇ ਨੂੰ ਸਮਝਿਆ ਇਹਦੇ ਪਿੱਛੇ ਕੀ ਹੈ ਇਹ ਬਹੁਤ ਬਾਸਾਂ ਮਾਰ ਕੇ ਜਾਂਦੇ ਹੁੰਦੇ ਨੇ ਜਿਸ ਕੋ ਪਸੰਦ ਨਹੀਂ ਆਖੇ ਜਾਂਦੇ ਹਾਂ ਜੀ ਇਹ ਉਹ ਵਾਸਤੇ ਰੇਮਨ ਮੇਰੇ ਸਦਾ ਜਾਪ ਅਬਨਾਸੀ ਪ੍ਰਭ ਆਪੇ ਆਬਨਾਸੀ ਪ੍ਰਭ ਆਪੇ ਆਵੇ ਪ੍ਰਭ ਆਪਣੇ ਅਬਨਾਸੀ ਹੈ ਤਾਂ ਜੈਸਾ ਜਪੀਏ ਜੈਸਾ ਹਾਂ ਸੇਵਾ ਦਾਸੋ ਇਹ ਸੇਵਾ ਜਪਣਾ ਸੇਵਾ ਹੀ ਹੈ ਜਦੋਂ ਸੇਵੇ ਕਰੋ ਜੇ ਆਪਣਾ ਜੀ ਆਪਾ ਮਸੀਹ ਹੋਵੇ ਆਪਣਾ ਸੀ ਤਾਂ ਹੋਣਾ ਹੁਣ ਆਪਾਂ ਨੇ ਆਪਾ ਆਪਣਾ ਸੀ ਹੋਣ ਦੀ ਆਪਣੀ ਗੱਲ ਰੱਖੀ ਤੇ ਆਹ ਜੀ ਆਪਾਂ ਵੀ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਆਪਣ ਕੀਆ ਕਛੂ ਨਾ ਹੋਏ ਆਪਾਂ ਗਿਆ ਕਛਣੇ ਦਾ ਜੇ ਸੋ ਪ੍ਰਾਣੀ ਲੋਚੇ ਕੋਏ ਜੇ ਸੋ ਲੋਚੇ ਕੋਏ ਇਹ ਕੀ ਅੱਲਾਹ ਜੇ ਲੈ ਆਪਣੇ ਆਪੇ ਬਣਾ ਆਪਣੇ ਮੂਲ ਤੇ ਬਾਲਾ ਫੇਰਦੇ ਨੇ ਸਮਾਧੀ ਲਾਉਂਦੇ ਨੇ ਆਪਣਾ ਕੀ ਆ ਕੁਝ ਨਾ ਆਇ ਜੀ ਕੋਸ਼ਿਸ਼ ਨਾਲ ਤਰ੍ਹਾਂ ਇਸੇ ਨਿਕਲ ਜਾਗੇ ਜੈਸਾ ਪੁਰਾਣੀ ਲੋਚੇ ਕੋਈ ਤੇ ਤਾਂ ਆਪ ਜੱਪਣਾ ਉਹਨੇ ਸਮਝਾਉਣਾ ਤੇ ਕਹਾਂ ਆਣ ਆਈ ਏ ਪਰਮੇਸ਼ਰ ਮੈਂ ਗੂਹਮੇ ਲਗਾਜੂ ਕੁਝ ਏ ਤੋਂ ਮੇ ਲਗਾਜੂ ਕੁਝ ਏ ਇਕੱਠੇ ਕਰ ਸਾਹਾਰ ਜਿਸਰੇ ਜਨਨਾ ਇਸ ਗੇਨ ਨਾ ਹੀ ਤੇਰੇ ਕੋਸ਼ ਕਾਮ ਗਤ ਨਾਨਕ ਜਪ ਇਕ ਹਰ ਨਾਮ ਇਸ ਬੇ ਨਾ ਹੀ ਤੇਰੇ ਕੋਸ਼ ਆਪਣੇ ਹੂੜ ਦੇ ਮਤੈ ਤੈਨੂੰ ਹੋਰ ਕੋਈ ਗੱਲ ਨਹੀਂ ਤੇਰਾ ਕਾਮ ਖਤਾ ਬੁਝ ਇਹ ਤੇਰੇ ਕੁਝ ਵੀ ਕਾਮ ਆਣ ਵਾਲੀ ਚੀਜ਼ تن اور ਕੋਈ قاب دی باقی دا ਵਰਕਾਜ ہے تیرا فین کام نہیں ہے تیری সেবা主 کی সেবা शब्द विचार اے کام دے جس میں نہ ہی تیرے کچھ کام गत नानक ਆਕੀ ਦੇਦੇ ਕੁਝ ਵੀ ਕਬੂਲ ਨਾ ਲਈ ਇੱਥੇ ਜੇ ਹੋਰ ਕਮਾਂਜੇ ਦਾ ਪੱਲਾ ਛੁੱਟ ਗਿਆ ਨਾ ਜਾਂ ਬਾੜਾ ਆਕੀ ਕੁਝ ਵੀ ਕਬੂਲ ਨਾ ਨੇ ਆ ਨਾ ਤੇਰੇ ਪੱਲਾ ਛੜਾਣਾ ਵਰਗਾ ਨਹੀਂ ਗਦ ਨਾਨਕ ਜਦ ਏਕ ਹਰ ਨਾਮ ਨਾਨਕ ਜਾਂ ਬੇਦਾਰ ਨਾਮ ਏਕ ਹਰ ਨਾਮ ਤਾਂ ਗਤੀ ਹੀ ਲੱਗੇ ਕੇ ਕੇ ਵਦੈਾ ਗਤੀ ਨਾਮ ਸਵਨ ਰਚਾਇ ਜਬ ਇੱਕ ਹਰ ਨਾਮ ਇਸ ਕੇਵਲ ਨਾਮ ਜੇ ਪੜਦੇ ਬਿਚੇ ਕਤੀ ਅਗਿਆਤ ਕੇ ਬੁੱਧ ਬੁੱਧੀ ਚਲਿਆ ਨਹੀਂ ਜਾਣਦੇ ਤੇ ਸੁਣੀ ਜਾਣੋ